ਅਥ ਤਰ ਤੋਰ ਜੁਮਲਾ ਅਰਜਨ ਤਾਰ ਬੋ ਸੋਈਆ ਫੇਰ ਉਠੀ ਜਸਦਾ ਪਰਪਾਇਨ ਤਾਕੀ ਕਰੀ ਬੋ ਭਾਤ ਵਡਾਈ ਹੇ ਜਗ ਕੇ ਪਤ ਹੇ ਕਰਨਾਨਦ ਅਜਾਨ ਕਹਿਓ ਮੰਮਾਈ ਸਾਰੇ ਥਿਮੋ ਹਮਰੇ ਤੁਮ ਔਗਨ ਹੋਐ ਮਤ ਮੰਦ ਕਰੀ ਜੋ ਟਠਾਈ ਮੀਠ ਲੈਓ ਮੁਖ ਹਰਦੀ ਤਿਹ ਪੈ ਮਮਤਾ ਡਰ ਬਾਤ ਛਪਾਈ ਕਵਿਤ ਕਰਨਾ ਕਹਿ ਜਸਦਾ ਕਹਿਓ ਹੈ ਮੰਗੋਪਨ ਸੁਖੇਰ ਦੇ ਕੇ ਕਾਜ ਰਾਲ ਆਏ ਗੋਪਨ ਸੋ ਬਾਰਕੂ ਕੇ ਕਹਿ ਕਰ ਕ੍ਰੋਧ ਮਨ ਆਪਣੇ ਮੈਂ ਸ਼ਾਮ ਕੋ ਪ੍ਰਹਾਰ ਤਨ ਲਾਗੀ ਛੂਚ ਕਨ ਸੋ ਦੇਖ ਦੇਖ ਲਾਸਨ ਕੋ ਰੋਵੈ ਸੁਤ ਮਾਤ ਕਹਿ ਕਬ ਸ਼ਾਮ ਮਹਾ ਮੋਹ ਕਰ ਮਨ ਸੋ ਰਾਮ ਰਾਮ ਕਹਿ ਸਬੋ ਮਾਰ ਬੇਗੀ ਕਹਾ ਚਲੀ ਸਾਂਹੇ ਨਾ ਬੋਲੀਐ ਰੀ ਐਸੇ ਸਾਧ ਜਨ ਸੋ ਦੋਹਰਾ ਖੀਰ ਬਲਵਨ ਕੋ ਠੀ ਜਸਦਾ ਹਰ ਕੀ ਮਾਏ ਮੁਖਤੇ ਗਾਵੇ ਪੂਜ ਗੁਣ ਮਹਿਮਾ ਕਹੀ ਨਾ ਜਾਏ ਸਿਆ ਇਕ ਸਮੈ ਜਸਦਾ ਸੰਗੋਪਨ ਖੀਰ ਮਥਾ ਕਰ ਲੈ ਕੈ ਮਧਾਨੀ ਉਪਰ ਕੋ ਕਟ ਸੋ ਕਸ ਕੈ ਪਟਰੋ ਮਨ ਮੈਂ ਹਰ ਜੋਤ ਸਮਾਨੀ ਕੰਟਕਾ ਛੁਦਰ ਕਸੀ ਤਹਿ ਉਪਰ ਸਿਆਮ ਕਹੀ ਤਹਿ ਕੀ ਜੋ ਕਹਾਣੀ ਦਾਨ ਔ ਪ੍ਰਾਕਰਮ ਕੀ ਸੁਧ ਕੈ ਮੁਖਤੈ ਹਰ ਕੀ ਸੁਭ ਗਾਉਤ ਬਾਣੀ ਖੀਰ ਭਰਿਓ ਜਬ ਹੀ ਤਹਿ ਕੋ ਕੋਚ ਤਉ ਹਰ ਦੀ ਤਬ ਹੀ ਪੁਨ ਜਾਗੇ ਪਏ ਸੋ ਬਿਆਵ ਜਸਦਾ ਪ੍ਰਭ ਜੀ ਇਹੀ ਰਸ ਮੈਂ ਅਨੁਰਾਗੇ ਦੂਧ ਫਟਿਓ ਹੋਏ ਬਾਸਨਤੇ ਤਬ ਧਾਇ ਚਲੀ ਇਹ ਰੋਮਨ ਲਾਗੇ ਕ੍ਰੋਧ ਕਰਿਓ ਮਨ ਮੈਂ ਬ੍ਰਿਧ ਕੇ ਪਾਤੀ ਪੈ ਘਰ ਤੇ ਉਠ ਬਾਹਰ ਭਾਗੇ ਗੋਹਰਾ ਕ੍ਰੋਧ ਪਰੇ ਹਰਦੀ ਮਨ ਮੈਂ ਘਰ ਤੇ ਬਾਹਰ ਜਾਏ ਸੰਗ ਸਖਾ ਲੈ ਕਪ ਸਬੈ ਆਏ ਸਹਿਰ ਬਨਾਏ ਪਾਥਰ ਕੋ ਗਹਿ ਕੇ ਕਰੈ ਦੀਨੋ ਮਟ ਸੋ ਭਗਾਏ ਖੀਰ ਦਸੋ ਦਸ ਚਲਿਓ ਔ ਪੀਨੂ ਹਰਿ ਧਾਇ ਸੈਨ ਬਣਾਏ ਭਲੋਹਰ ਜੀ ਜਸਦਾ ਦਦ ਕਹੋ ਮਿਰ ਲੂਟਣ ਲਾਏ ਹਾਥਨ ਵੈ ਗਹਿ ਕੈ ਸਭ ਵਾਸਨ ਕੈ ਬਲ ਕੋ ਬਗਾਏ ਫੂਟ ਗਏ ਵੈ ਫੈਲ ਪਰਿਓ ਦਦ ਭਾਵੈ ਕਬ ਕੇ ਮਨ ਆਏ ਕੰਸ ਕੋ ਕਹੋ ਅਗਵਾ ਜਨ ਆਗਮ ਕਾਣ ਜਨ ਆਏ ਤਿਨ ਜੋ ਸਭ ਵਾਸਨ ਕ੍ਰੋਧ ਭਰੀ ਜਸਦਾ ਤਬ ਧਾਈ ਚੜੈ ਕਬ ਰੂਖਣ ਰੂਖਣ ਗਵਾਰ ਨੂੰ ਗਵਾਰ ਭਗਾਈ दौर्त दौर्त वै जी पसदा पर अपनी मात हराई श्याम कहै फिर कै ब्रज के पाति उखल सोफुन गुण देह बंधाई सुइया हर जी जसदा जब बांध रही रसिया नहीं मावै कै इकठी ब्रज की रसिया सब जो रही कय थाए ना पावै धीर बंधाए पै ब्रिज के पाति ऊखल सो तरि उपर ठावै साधु धर्म को जमलार्जन ताहे नमित किद होवै हजावै इन्दो राम की सतकीसत कान उद्धारत साध निकट तवै तिनके कहे जानन हार आगाद सुइया ऊखल कान अराय किद बल कै तन को तरतूर दए है तौ निक्षे तिन तै जूं लार्जन कै बिनती सुर लोक गए है ता छबके जस उच्च महा कव के मन मै भांत पै है नागन के पुरते मद के मटके मत, मत कील जो ऐच लए है सोइया कौतुक देख सबै के जन जाय तवै जस पै आखी तूर दए तन को बल कै तर भांत भली हर की शुभ साखी ता छबकी उपमा आते कबने अपने मुख इम भाखी फेर कहि पाय राए ताय उडे ज्यों धरते उड़ जात है माखी ਦੈਤਨ दैतन के बद कहो शिवो उर्त है नेशो करता सुख दैया लोकन को बरता हरता दुख है करता मुसली धरपैया डार दई ममता हार दी ता बोल उठी ए है मम दैया खेल बनाए दयो हम को बिद जो जनमयो ऐ श्री विचित्र नाट ग्रंथे कृष्ण अवतारे तर तोर लार जन उद्धार बो वर्णन स्वया तर जोते ही तब गोपन भूधन मंत्र विचारो गोकुल कोत्त जिय चलीए ब्रज हवै या भावते पावन भारो बात सुनी जसदा अरनंदा व्योत भलो मन मद विचारो और पली एते ना कछु जहेते श्याम हमारो ਕਾਸ ਬਲਉਤਮ ਛਾਪਲੀ ਜਮਨਾ ਟਿਗ ਹੈ ਨਗ ਹੈ ਟਟ ਜਾਕੇ ਕੂੜ ਚਰੈ ਚਰਨਾ ਤਿਹ ਤੇ ਜਗ ਮੈਂ ਸੰਤੁਲ ਨਹੀਂ ਕਜਤਾਕੇ ਬੂਲਤ ਹੈ ਪਿਕ ਕੋਕਲ ਮੋਰ ਕਿਦੋ ਘਰ ਮੈਂ ਚਹੁ ਗੋਰਨ ਵਾਕੇ ਬੇਕ ਚਲੋ ਤੁਮ ਗੋਕਲ ਕੋ ਤਜ ਹੁਨ ਹਜ਼ਾਰ ਅਬੈ ਤੁਮ ਗਾਕੇ ਦੋਹਰਾ ਆਨੰਦ ਸਬੈ ਗੋਪਨ ਸੁਨੈ ਬਾਤ ਕਹੀ ਇਹ ਠੌਰ ताज ਗੋ बृज को चले एते भली ना और लटपड़ बांदे उठ चले आए जब बृजधीर देख्यो अपने नयन पर बहतो जमुना नीर स्विया आए सपाए कह नंद है को सब गोपुन जाय भले रथ साजे बैठ सबे तिन पैर तेरी आस संग गावत जात बजावत बाजे हेम को दान करै जो दोउ हर गोद लै जस बा इम रादे कह दो सहल सुता गिर पीतर ऊच मनहु मन नील बिराजे गोप गए तज गोकुल को बृज अपने अपने डेर ने आए डार दई लसिया अरि अछ दवार भीतर तूप जगाए ता छब को जस उच्च महा कबनै मुक्त इम भाग सुनाए राज विभीषण दय किदो लंक को राम जी ਕਬਿਓ ਬਾਜ ਦੋਹਰਾ ਕੋਪ ਸਵੇ ਬ੍ਰਿਜ ਪੁਰਬਿ ਖੈ ਬੈਠੇ ਹਰਖ ਵਢਾਏ ਅਵ ਮੈਂ ਲੀਲਾ ਕ੍ਰਿਸ਼ਨ ਕੀ ਮੁਖਤੇ ਕਹੋ ਸੁਨਾਏ ਸੋਇਆ ਸਾਤ ਬਤੀਤ ਭੈ ਸਾਲ ਲਗੇ ਤਬ ਕਾਣ ਚ ਪਾਤ ਬਜਾਵਤ ਹੋ ਮੁਰਲੀ ਮਿਲ ਗਾਉਤ ਗੀ ਸਵੇ ਲਰਕਉਆ ਗੋਪਨ ਲੈ ਗ੍ਰਹਿ ਆਵਤ ਧਾਵਤ ਤਾੜਤ ਹੈ ਸਭ ਕੋ ਮਨ ਭਉਆ ਦੂਧ ਪਿਆਵਤ ਹੈ ਜਸਦਾ ਰਿਜਕ ਹੈ ਹਰ ਖੇਲ ਕਰੈ ਜੋਨ ਰੂ ਰੂਗੈ ਗਿਰ ਕੈ ਤਸ ਕੈ ਸੰਗ ਦਇ ਚਲਾਏ ਦਇਓ ਹਰ ਜੀ ਜੋ ਫੂਲ ਗਰੇ ਨਵ ਮੰਡਲ ਤੇ ਉਮਾਂ ਤਹਿ ਕੀ ਕਬਨੈ ਜੋ ਕਰੀ ਜੋ ਤਨ ਹੀ ਤਨ ਪੈਉ ਤਿਹੁ ਲੋਕਨ ਭੂਮਿਕੋ ਭਾਰ ਅਬੈ ਕਟ ਕੀ ਜੋ ਸਿਆਮ ਕਥਾ ਸੋ ਕਹੀ ਇਸ ਕੀ ਚਿਤ ਦਇ ਕਬਿ ਪੈ ਇਹ ਕੋ ਜੋ ਸਨੀਜੋ ਕੌਤਕ ਦੇਖ ਸਭੈ ਅਮ੍ਰਿਤ ਬਾਲਕ ਡੇਰਨ ਡੇਰਨ ਜਾਏ ਕਹੀ ਹੈ ਦਾਨੋ ਕੀ ਬਾਸੁਨੀ ਜਸਦਾ ਗਏ ਆਨੰਦ ਕੇ ਮਧ ਬਾਤ ਰਹੀ ਹੈ ਤਾ ਛਭ ਕੀ ਅਤਿ ਹੀ ਉਪਮਾ ਕਬਨੇ ਮੁਖਤੇ ਸਰਤਾ ਜੋ ਕਹੀ ਹੈ ਫੈਲ ਪਰੋ ਸੋ ਦਸੋ ਦਿਸ ਕੋ ਗਨਤੀ ਮਨ ਕੀ ਤਹਿ ਮਦ ਬਹੀ ਹੈ ਅਥ ਬਕੀ ਦੈਤ ਕੋ ਬਾਤ ਕਥਨ ਸੁਇਆ ਦੈਤ ਹਨੋ ਸੁਣ ਕੇ ਨਿਰਪਸਰ ਉਹਨਾਂ ਨੂੰ ਬਾਤ ਕਹੀ ਬਕ ਕੋ ਸੁਨ ਲਈਏ ਹੋਏ ਤਿਆਰ ਆਵੇ ਤੂੰ ਤੇ ਤਜ ਕਹਿ ਮਥੁਰਾ ਬ੍ਰਿਜ ਮੰਡਲ ਜਈਏ ਕਹਿ ਤਸਲੀਮ ਚਲਿਓ ਤਿਹ ਕੋ ਜਬ ਦਾਸ ਹੈ ਮੁਸਲੀ ਤਰ ਭਈਏ ਕੰਸ ਕਹੀ ਹੱਸ ਕੇ ਕੋ ਸੁਨ ਰੇ ਉਹੇ ਕੋ ਛਲ ਸੋ ਹਨ ਦਈਏ ਸਵਿਆ प्रात ਪੈ बछरे संग लै कर बीज गए बन कै गिरधरारी फिर गए जमुना तट ਜਲ बछरे ਅਚੈ शुद्ध ਆਏ नहकारी आए गयो उद्द दैत बकासुर देखन माहे भयानक भारी लील लै सब है पगला फिर छोर गए हर जोर गुजारी दोहरा अगण दूर तब कृष्ण तार कंठ दयो तेजाल गह सोमुक्त ठाणत पयो उगल डरयो ਚੂਟ ਕਰੀ ਓਨ ਜੋ ਇਹ ਪੈ ਇਨ ਤੋ ਬਲਕਾ ਉਹ ਚੋਚ ਗਹੀ ਹੈ ਚੀਰ ਦਈ ਬਲਕੈ ਤਨ ਕੋ ਸਰਤਾਇ ਕਿਸ ਰਹੁ ਨਦ ਸਾਥ ਬਹੀ ਹੈ ਔਰ ਕਹਾ ਉਗਮਾ ਤਹਿ ਕੀ ਸੋ ਕਹੀ ਜੋ ਕਛੂ ਮਨ ਮੈਂ ਇਮ ਦਿਓ ਦਿਨ ਮੈਂ ਦੁੱਧ ਦੀਪ ਸਮਾਏ ਰਹੀ ਹੈ ਕਬਿਤ ਜਵੈ ਦੇ ਰਾਇਓ ਮਹਾਮੁਖ ਚਵਰਾਇਓ ਜਬ ਜਾਨ ਹਰੀ ਪਾਇਓ ਮਨ ਕੀਨੋ ਵਾਕੇ ਨਾਸ ਕੋ ਸਿੰਧ ਸੁਤਾ ਪਾਤਨ ਆ ਉਹ ਘਾਰ ਢਾਰੀ ਚੋਜਵਾ ਕੀ ਬਲੀ ਮਾਰ ਢਾਰਿਓ ਮਹਾ ਬਲੀ ਨਾਮ ਜਾਸ ਕੋ ਭੂਮ ਗਿਰ ਪਰਿਓ ਹੈ ਦਟੂਕ ਮਹਾ ਮੁਖਤਾ ਕੋ 타 ਕੀ ਛਬ ਕੈ ਵੇ ਕੋ ਭਇਓ ਮਨ ਦਾਸ ਕੋ ਖੇਲ ਬੀ ਕੀ ਕਾਜ ਬਨ ਬੀਜ ਗਏ ਬਾਲਕ ਜਿਉ ਲੈ ਕੈ ਕਰ ਮਦ ਜੀਰ ਢਾਰੈ ਲਾਂਬੇ ਘਾਸ ਕੋ ਇਤ ਬਕਾਸ ਹਿਰਦੈਤ ਬਧੈ ਸੰਗ ਲੈ ਬਥਰੇ ਅਰ ਸੋ ਸਾਥ ਪਰੀ ਹਰ ਢੇਰ ਆਏ ਉਹੇ ਪ੍ਰਸੰਨ ਮਹਾ ਮਨ ਮੈਂ ਮਨ ਭਾਵਤ ਗੀਤ ਸਭੋ ਮਿਲ ਗਾਏ ਤਾ ਛਵ ਕੋ ਜਸ ਉੱਚ ਮਹਾ ਕਵਨੈ ਮੁਕਤੀ ਇਹ ਬਿਨਾਏ ਦੇਵਨ ਦੇਵ ਹਨਿਓ ਤਰਪੈ ਛਲਕੈ ਤਰਿ ਔਰਨ ਕੋਜ ਸੁਨਾਏ ਕਾਣ ਦੀ ਉਬਾਜ ਗੋਪਨ ਪ੍ਰਾਤਿ ਸਵੈਯਾ ਫੇਰ ਕਹੀਏ ਗੋਪਨ ਕੋ ਕਹੁਨ ਪ੍ਰਾਤ ਪੈ ਸਭ ਹੀ ਮਿਲ ਜਾਵੇਂ ਅਨ ਅਚੋ ਆਪਣੇ ਗ੍ਰਹਿ ਮੋਹ ਜਿਨ ਮਦ ਮਹਾ ਬਨਕੇ ਮਿਲ ਖਾਵੇਂ ਬੀਤ ਰਹਿ ਹੰ ਪੈ ਜਮਨਾ ਮਨ ਭਾਵਤ ਗੀਤ ਸਵੇ ਮਿਲ ਗਾਵੈ ਨਾ ਚਹਿਗੇ ਅਰ ਕੂਦੈਗੇ ਗਹਿ ਕੈ ਕਰਮੈ ਮੁਰਲੀ ਸੋ ਬਜਾਵੈ ਸੋਇਆ ਮਾਨ ਲਿਓ ਸਭਨੋ ਵਾਘੋਪਨ ਪ੍ਰਾਤ ਭਈ ਜਬ ਰੈਨ ਬਿਹਾਨੀ ਕਾਨ ਬਜਾਇ ਉਠੋ ਮੁਰਲੀ ਸਭ ਜਾਗ ਉਠੇ ਏਕ ਵਜਾਵਤ ਹੈ ਦ੍ਰੁਮ ਪਾਦ ਕਿਦੋ ਉਪਮਾ ਕਬ ਸਿਆਮ ਪਿਰਾਨੀ ਕੌਤਕ ਦੇਖ ਮਹਾ ਕੋਮ ਪ੍ਰਭੂਤ ਬਧੂ ਸੁਰ ਖਿਸਾਨੀ गेरी ਕੇ चित्र लगाए तनै सिर पंख धर्यो भगवान कलापी लाए तनै हरता मुरली मुख लोग भयो जे को सब जापी फूर गुछे सिर खोस ले तर रूख खरो धरनी जिन थापी खेल दिखावत है जग को वर को नहीं होए आप ही यापी कंस बाज मंतरीन सोंदोरा जव बक ले हर जी हनयो कंस सुनयो तब सरोन कर 71 मंत्र कहयो तहा भेजिए मंत्री बाज कंस प्रते सोइया बैठ विचार करयो नृप मंत्री ने दयत को कहो जावे मार्ग रूक रहै तिन को तर पन्नग रूप महा मुख बावै हाय परै हर जी जब ही तब ही सब ग्वास् स्नेह चब जावे आए है खाए तिनै सुन कंस के ना तरै अपनो जीव ग्वाववै अथे अघासुर दय त्याग मन सोइया जाहे कयो अग कंस गयो तहा पन्नग रूप महा धर आयो ਪ੍ਰਾਤਨਿਉ ਪਗ ਨੀ ਸੁਨ ਕੈ ਬਦ ਕੈ ਮਨ ਕ੍ਰੋਧ ਤਹਾਂ ਕਉ ਧਾਇਓ ਤਿਨ ਕੈ ਮਗ ਮੈ ਹਰ ਕੇ ਬਦ ਕਾਜ ਮਹਾ ਭੁਖ ਬਾਇਓ ਦੇਖ ਤਾਹ ਸਭੈ ਬ੍ਰਿਜ ਬਾਲਕ ਖੇਲ ਕਹਾ ਮਨ ਮੈਂ ਲਖ ਪਾਇਓ ਸਭ ਗੋਪਨ ਕੋ ਕਹੈ ਗਿਰ ਮਦ ਗੁਫਾ ਇਹ ਕੋ 71 ਕਹੈ ਅੰਧਿਆਰੋ 바ਰਜ ਕੋ ਕਹੈ ਇਹ ਰਾਛ ਕੋ ਕਹੈ ਇਹ ਪੰਨਗ ਭਾਰੋ ਜਾਏ ਕਹੈ ਇਕ ਨਾਹੇ ਕਹੈ ਇਕ ਬਿਯੋਦ ਹੀ ਮਨ ਮੈਂ ਤਿਨ ਧਾਰੋ ਏਕ ਕਹੈ ਚਲੋ ਭੋ ਨ ਕਹੂ ਸੋ ਬਚਾਵ ਕਰੈ ਖਨ ਸਿਆਮ ਹਮਾਰੋ ਹੀਰ ਖਰੈ ਤਹਿ ਮਦ ਤੁਝੇ ਨਾ ਉਨ ਰਾਛਸ ਮੀਚ ਹੈ ਸਿਆਮ ਜੂ ਆਵੈ ਜਬੈ ਮਮ ਹੋ ਬਿਯੋਦ ਹੀ ਮਨ ਮਦ ਕਯੋ ਹੈ ਕਾਨ गए ਤਬ मीठ लेओ ਮੁਖ ਦੇਵਨ तो आहाकार पयो ਹੈ जीवन मूर्ति हमरी अब सौव अगहसर चाब गयो है सैया देह बढाए बडो हर जी मुख रोक लेओ ओ राच सी को रोक ले सब ही करकै बल सास बढयो तब ही ओहो जी को कान विदार दयो ਗੂਦ ਪਰਿਉਤੇ ਕੋ ਹਿਮ ਜੋ ਸਵਦਾਗਰ ਕੋ ਟੁਟ ਗਿਓ ਮਟਕੀ ਕੋ ਰਾਹ ਪਿਉ ਤਬ ਹੀ ਨਿਕਸੀ ਹਰਿਗੁਆਰ ਸਵੇ ਨਿਕਸੀ ਤੇਹ ਨਾਰੇ ਦੇਵ ਕਬੈ ਹਰਖੇ ਮਨ ਮੇ ਪਿਖ ਬਚੋ ਹਰਿ ਪੰਨੰਗ ਭਾਰੇ ਗਾਵਤ ਕੀ ਸਵੇ ਗਣ ਗੰਦਰਵ ਬ੍ਰਹਮ ਸਬੋ ਮੁਖ ਬੇਦ ਉਚਾਰੇ ਆਨੰਦ ਸਿਆਮ ਪਿਉ ਮਨ ਮੇ ਨਗ ਰਖਕ ਜੀ ਚਲੇ ਘਰ ਭਾਰੇ ਸੋਇਆ ਕਾਂ ਕਢਿਓ ਸਿਰ ਕੇ ਮਗ ਵੈ ਨਾ ਕਢਿਓ ਮੁਖ ਕੇ ਮਗਜੂਰ ਅੜੀਕੇ ਸਰਾਉਣ ਪਰਿਓ ਇਮਠਾੜ ਪਇਓ ਪਹਰੇ ਪਟ ਜਿਉ ਮੂਨ ਸਿੰਘ ਮੜੀਕੇ ਏ ਕਹੀ ਇਹ ਕੀ ਉਪਮਾ ਗੁਣਿਓ ਕਵਕੇ ਮਨ ਮਧ ਬੜੀਕੇ ਢੋਤ ਈਟ ਗੁਆਰ ਸਨੈ ਤਾਰੇ ਦੌਰ ਚੜੇ ਜਨ ਸੀਸ ਗੜੀਕੇ ਇਤ ਅਘਾਸ ਹਿਰਦੈਤ ਬਧੈ